ੴ ओंकार हुकुम सत श्री वाहेगुरु जी की फतह जफर नाम महा श्री मुख वाग पाद शहीद दशमी कमालए करामत कायम करीम रजा बख्श रा जिक्र हा कुन रहीम अमां बख्श बख्शें दो औ दस्तगीर खता बख्श रोजी ਸ਼ੈਨ ਸ਼ਾਇ ਖੂਬੀ ਦਿਹੋ ਰਹਾ ਨਮ ਕੇ ਬੇਗੂਨ ਬੇਚੂਨ ਚੂਬੇ ਨਮ ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਫਰਸ਼ੇ ਗੁਦਾਵੰਦ ਬਖਸ਼ਿੰਦੇ ਐਸ਼ ਅਰਸ਼ ਜਹਾਂ ਪਾਕ ਜਬਰਸਤ ਜ਼ਾਹਿਰ ਜ਼ਹੂਰ ਉਜਾਮੀ ਦਿਓ ਹਮ ਚੋ ਹਜ਼ੂਰ ਅਤਾ ਬਖਸ਼ਿਓ ਪਾਕ ਪਰਵਰਦੀਗਾਰ ਰਹੀਮ ਅਸਤ ਰੋਜ਼ੀ ਦਿਓ ਹਰ ਦਿਆਰ ਕੇ ਸਾਹਿਬ ਦਿਆਰ ਅਸਤ ਅਜ਼ੀਮ ਕੇ ਹੁਸਨਲ ਜਮਾਲ ਅਸਤ ਰਾਜ ਕਰਹੀਮ ਕੇ ਸਾਹਿਬ ਸ਼ਹੂਰਸਤੇ ਆਜਿ ਜਿ ਨਿਵਾਜ਼ ਗਰੀਬੁਲ ਪਰਸਤੋਕ ਨੀ ਮੂਲ ਗੁਦਾਸ ਸ਼ਰੀਅਤ ਪਰਸਤੋ ਫਜ਼ੀਲ ਮਆਬ ਹਕੀਕਤ شناਸੋ ਨਬੀ ਉਲ ਕਿਤਾਬ ਗੇ ਦਾਨਿਸ਼ ਪੀਉ ਹਸਤ ਸਾਹਿਬ ਸ਼ਹੂਰ ਹਕੀਕਤ شناਸ ਹਸਤ ਜਾਹਰ ਜਹੂਰ شناਸਿੰਦਹੇ ਇਲਮ-ਏ-ਆਲਮ ਖੁਦਾਏ ਕੁਸ਼ਾਇਂਦਹੇ ਆਲਮ ਕੁਸ਼ਾਇਂ ਗੁਜ਼ਾਰਿੰਦਹੇ ਕਾਰ-ਏ-ਆਲਮ ਕਵੀਰ شناਸਿੰਦਹੇ ਇਲਮ ਆਲਮ ਅਮੀਰ ਦਾਸਤਾਨ ਹਿਕਾਇਤ ਪਹਿਲੀ ਮਰਾ ਏਤਵਾਰੇ ਬਰੀ ਕਸਮ ਨੇਸਤ ਕੀ ਜਦ ਗਵਾਸਤ ਯਜਦਾਂ ਯਕੇਸ ਨ ਕਤਰਹਾ ਮਰਾ ਏਤਵਾਰੇ ਬਰੋਸਤ ਕੇ ਬਖਸ਼ੀ ਵਾਦੀ ਵਾ ਹਮਾ ਕਿਸਬ ਗੋਸ਼ ਕਥੇ ਕੌਲ ਕੋਰ ਆਂ ਕੋ ਨਦ ਏਤਵਾਰ ਹਮਾਰੋ ਜ ਆਖਰ ਸ਼ਵਦ ਮਰਦਖਵਾਰ ਹਮਾਰਾ ਕਥੇ ਸਾਹੇ ਆਇਤ ਬਜੇਰ ਬਰੋ ਦਸਤ ਧਾਰ ਨ ਜਾਗੋ ਦਲੇਰ कसे पुछ तो उफदद पसे शेर नर नागी रत बुजो मेशो आहु गुजार कसम वसहवे खुफी अव गरी कुरम न फौज अजीज देर सुम आप कुनम गुर सनहा चकार के 10 लाख बराए बर के पैमा शिकन भेद रंग आम दंद मया तेग तीरो आम दंद बा लाचार की दर में आया आम दम बतद वीर तीरोत हमाहील ते धर गुजश हलाल हस्त बुरदन बा शमशीर दस्त जे कसमे कुरान मन को नाम एत बार बगैर नत गोई मनी रह चेकार कार न दानम के ई मर्द रो वाह पेज वगर हर गजी रह न यार बहेज ਹਰ ਆਂ ਕਸ ਕੇ ਕੌਲੇ ਕੁਰਾਨ ਆਏ ਦਾਸ਼ ਨਜੋ ਬਸਤ ਨੋ ਕੁਸਤਨੀ ਵਾਏ ਦਾਸ਼ ਵਰੰਗੇ ਮਗਸਿਆਹ ਪੋਸ਼ਾਮਦਨ ਬ ਯਕਬਾਰਗੀ ਦਰਖ ਰੋਸ਼ਾਮਦਨ ਹਰ ਆਂ ਕਸ ਦੇ ਆਮਦ ਬੇਰੂ ਵਖੁਰਦੰ ਯਕੇ ਤੀਰ ਸ਼ੁਧ ਕਰਕ ਖੂੰ ਬੇਰੂ ਨੇ ਆਮਦ ਕਸੇ ਜਾਂ ਦੀਵਾਰ ਨਾ ਖੁਰਦੰਦ ਧੀਰੋ ਨਾ ਗਸ਼ਤੰਦ ਖਵਾਰ ਜੋ ਦੀਦਮ ਕੇ ਨਾ ਹਰ ਪੇ ਆਮਦ ਬਾਜੰਗ ਚਾਸ਼ੀ ਦਾ ਯਕੇ ਤੀਰ ਮਨ ਬੇਦ ਹਮ ਆਖਿਰ ਬਜਾਏ ਮਸਾਫ ਬਸੇ ਖਾਨਾ ਖੁਰਦੰਦ ਬੇਰੂ ਗਜ਼ਾਬ ਕਿ ਆਵਗਨ ਦੀ ਗਰਬੇ ਆਮਦ ਪਾਜਾਂਗੇ ਚੋ ਸਹਲੇ ਰਵਾ ਹਮ ਚੋ ਤੀਰੋ ਤੂਫਾਂਗ ਬਸੇ ਹਮਲਾ ਕਰ ਦੰਦ ਮਰਦਾਨਗੀ ਹਮ ਅਜ ਹੋਸ਼ ਗੀ ਹਮ ਜੇ دیਵਾਨ ਬਸੇ ਹਮਲਾ ਕਰ ਬਸੇ ਰਖਮ ਖੁਰਦ ਦੋ ਕਸਰਾ ਸਖਾ ਕੁਸਤ ਹਮ ਜਾਸਪੁਰਦ ਕੇ ਆਖ ਆਜਾ ਮਰਦੂਦ ਸਾਹੇ ਦੀਵਾਰ ਨਯਾਮ ਦਬਾ ਮੈਦਾਂ ਬਾ ਮਰਦਾਨਵਾਰ ਦਰੇਗਾ ਅਗਰ ਰੂਏ ਓ ਦੀਦ ਮੇ ਬਾ ਤੀਰ ਲਾਚਾਰ ਬਖਸ਼ੀਦ ਮੇ ਹਮ ਆਖਿਰ ਬਸੇ ਜ਼ਖਮ ਤੀਰੋ ਤਫੰਗ ਦਸੂਏ ਬਸੇ ਕੁਸਤਾ ਸ਼ੁਦ ਬੇਦ ਰੰਗ ਬਸੇ ਮਾਰ ਬਾਰੀਦ ਤੀਰੋ ਤਫੰਗ ਜ਼ਮੀ ਗਸ਼ਤ ਹਮ ਤੂ ਗੁਲੇ ਲਾਲਾ ਰੰਗ ਸਰੂਪਾਏ ਹੰਬੋ ਚੰਦਾ ਸੁਦਾ ਕੇ ਮੈਦਾਂ ਪੁਰੇ ਅਦ ਗੂਓ ਚੌਗਾ ਸ਼ੁਦਾ ਤਰੰਕਾਰੀ ਤੀਰੋ ਤਰੰਗੇ ਕਮਾ ਬਰਾਮਦ ਯਕੇ ਹਾਉ ਹੂ ਅਜ ਜਹਾਂ ਜਿਗਰ ਸ਼ੋਰਿ ਸ਼ਕ ਹੈ ਬਰੇ ਕੀ ਨਹਾ ਕੋ ਜੇ ਮਰਦਾਨੀ ਰਫਤ ਹੋਸ਼ ਹਮ ਆਖਰ ਤੇ ਮਰਦੀ ਕੁਨਦਕਾਰ ਜ਼ਾਰ ਕੇ ਬਰ ਹਿਲ ਤਨ ਦਸ਼ ਬੇਸ਼ੁਮਾਰ ਚਰਾਗੇ ਜਹਾਂ ਚੂਸ਼ੁਦਾ ਬੁਰਕਾ ਪੋਸ਼ ਸਹਿ ਸਭ ਬਰਾਮਦ ਹਮਾ ਜਲਵਾ ਜੋਸ਼ ਹਰ ਆਂਕਸਬਾ ਕੌਲੇ ਕੁਰਾਂ ਆਏ ਦਸ਼ ਕਿ ਏਜਦਾ ਵਰੋ ਰਹਿ ਨਮਾਇ ਆਏ ਨਾ ਪੇਜੀ ਧਮੂਵੇ ਨ ਰੰਜੀ ਦਾ ਕੇ ਬੇਰੂ ਖੁਦਾ ਵਰਦ ਦੁਸ਼ਮਨ ਸ਼ਿਕਨ ਨਾ ਦਾਨਮ ਕੇ ਈ ਮਰਦ ਪੈ ਮਾਸ਼ਿਕਨ ਕੇ ਦੌਲਤ ਪਰ ਅਸਤਸਤ ਈ ਮਾਫਕਨ ਨਾ ਈ ਪਰ ਅਸਤੀ ਨਾ ਆਉ ਜਾਏ ਨਾ ਸਾਹਿਬ ਸ਼ਲਾਸ਼ੀ ਨਾ ਮੁਹੰਮਦ ਯਕੀਂ ਹਰੇ ਆਂਕਸ ਕੇ ਈਵਾ ਪਰਸਤੀ ਕੁਨਦ ਨਾ ਪੈ ਮਾ ਖੁਦਾ ਸਪੇਸ਼ ਉਪਸਤੀ ਕੁਨਦ ਕਿ ਈ ਮਰਦ ਰਾਜ਼ਰ ਹੈ ਇਤਵਾਰ ਨੇ ਕੇ ਕਿ ਕਸਮੇ ਕੁਰਾਨ ਹਸਤ ਯਜਦਾ ਯਕੇਸ ਜੋ ਕਸਮੇ ਕੁਰਾਨ ਸਦ ਕੁਨਦ ਮਰਾ ਕਤ ਰਹ ਨਾਇਦ ajo ਇਤਵਾਰ ਅਗਰ ਜੀ ਤੁਰਾ ਇਤਵਾਰ ਆਮਦੇ ਕਮਰ ਬਸਤ ਈ ਪੇਸ਼ਵਾ ਆਮਦੇ ਕਿ ਫਰਜ ਹਸਤ ਬਰਸਰ ਤੁਰਾ ਹੀ ਸੁਖਨ ਕੇ ਕੌਲੇ ਖੁਦਾ ਹਸਤ ਕਸ ਮਨ ਅਗਰ हजरत ਤੇ तादहश्वद वजानो वा वा दिलेकार वादहश्वद वा तुम्हारा ਕਾਰ अस्त कारे ਸੁਮਾਰਾ बामूज बनिष्ठा तुम्हारे कुनी निविष्ठा रसी दो बगुफाज वा बेबायद के ईकार राहत रसा हमू मर्द वाएदश्वद सुखन वार न शिकमे दिगर दर्द हाने दिगर के ਤੁਰਾ ਗਰਬ ਬਵਾਇਦ ਬਕੌਲੇ ਕੁਰਾਂ ਬਨਿ ਤੇ ਸ਼ਮਾਰਾ ਰਸਾਨ ਹੁ ਹਵਾ ਕਿ ਤਸ਼ਰੀਫ ਧਰ ਕਸਬਾ ਵਜਾਂ ਪਾਸ ਮੁਲਾਕਾਤ ਬਾ ਹਮਸ਼ਵਦ ਨਾ ਜ਼ਰਹਾ ਦਰੀ ਰਾ ਹਮੈ ਕੌਮਿ ਬਹਿਰਾੜ ਹੁਕਮੇ ਮਰਾਸਤ ਬਿਆਤਾਪ ਮਨ ਖੁਸ ਕੁਨੇਮ ਬਰੂਏ ਸ਼ੁਮਾ ਮਿਹਰਬਾਨੀ ਕੁਨੇਮ ਯਕੇ ਅਸਵ ਸ਼ਾ ਇਸਤੇ ਯਕ ਹਜ਼ਾਰ ਬਿਆਤਾਪ ਗੀਰੀ ਬਾ ਮਨੀ ਦਿਆਰ ਸ਼ਾਨ ਸ਼ਾਇਰਾ ਬੰਦ ਹੈ ਚਾਕਰੇਮ ਅਗਰ ਹੁਕਮ ਆਇਦ ਵਾਜਾਂ ਹਾਜ਼ਰੇ ਅਗਰ ਤੇ ਬਿਆਇਦ ਬਾ ਫੁਰਮਾਨ ਮਨ ਹਜ਼ੂਰਤ ਬੇ ਆਇਮ ਹਮਾਏ ਜਾਨ ਤਨ ਅਗਰ ਤੋ ਵਜੈ ਤਾਂ ਪਰਸਤੀ ਕੁਨੀ ਬਾਕਾਰੇ ਮਰਾਈ ਨਾ ਸੁਸਤੀ ਕੁਨੀ ਬੇ ਬਾਇਦ ਕੇ ਯਦਾਂ ਸ਼ਲਾਸੀ ਕੁਨੀ ਨਾ ਗੁਫਤਾ ਕਸੇ ਕਸਖਰਾਸੀ ਕੁਨੀ ਤੂੰ ਮਸਨਦ ਨਸ਼ੀ ਸਰਵ ਰੇ ਕਾਇਨਾਤ ਕੇ ਅਜਵਾਸਤੇ ਇਨਸਾਫ ਹੀ ਹਮ ਸਫਾਤ ਕੇ ਅਜ ਵਸਤੇ ਇਨਸਾਫੋ ਦੀ ਪਰਵਰੀ ਕੇ ਹੈ ਫਸਤ ਸਦ ਹੈ ਪਈ ਸਰਵਰੀ ਕੇ ਅਜ ਵਸਤੇ ਅਜ ਵਸਤੇ ਤਕਵਾਸ਼ ਮਾ ਬਜੂ ਜ਼ਰਾਸਤੀ ਸੁਖਨ ਗੁਫਤਨ ਦਿਆਂ ਮਜ਼ਾਨ ਤੇਗ ਬਾਰ ਖੂਨ ਕਸ ਬੇਦ ਰੇਗ ਤੁਰਾ ਨੀਦ ਖੂ ਅਸਤ ਬਾ ਤੇਗ ਤੋ ਗਾਫਲ ਮਸ਼ਵ ਮਰਦ ਯਜ ਤਾਂ ਕੇ ਉਹ ਬੇਨਿਆਜ ਅਸਤ ਉਹ ਬੇ ਸੁਪਾਸ ਕੇ ਊ ਬੇ ਮੁਹਾਬਸਤ ਸ਼ਾਹਾਂ ਨਿ ਸ਼ਾਹ ਜ਼ਮੀਨੋ ਜ਼ਮਾਂ ਸਾਚੇ ਪਾਦਸ਼ਾਹ ਖੁਦਾ ਵੰਦੇ ਇਜ਼ਤ ਜ਼ਮੀਨੋ ਜ਼ਮਾਨ ਕੁਨਿੰਦਸਤ ਹਰ ਕਸਮ ਕੀ ਨੋ ਮਕਾਮ ਹਮ ਅਜ ਪੀਰ ਮੋ ਰਹਾ ਹਮ ਅਜ ਫੀਲ ਤਨ ਕਿ ਆਜ ਅਜ ਨਿਵਾਜ ਅਸਤ ਕਾਫਲ ਸ਼ਿਕਨ ਕਿ ਊ ਰਾਚੋ ਇਸ ਆਜ ਅਜ ਨਿਵਾਜ ਕੇ ਊ ਬੀਸ ਪਾਸ ਅਸਤ ਊ ਬੇਨਿਆਜ਼ ਕਿ ਊ ਅਸਤ ਊ ਬੇਚਗੂ ਕਿ ਊ ਰਹਿਨਮਾ ਅਸਤ ਊ ਰਹਿਨਮੂ ਕੇ ਬਰਸਰ ਤੁਰਾ ਫਰਜ਼ ਕਸਮੇ ਕੁਰਾਨ ਵਾ ਗੁਫਤਾ ਸ਼ਮਾਕਾਰ ਖੂਬੀਰ ਸੰ ਬਿਬਾਇਨ ਤੋਂ ਦਾਨਿਸ਼ ਪਰਸਤੀ ਕੁਨੀ ਵਾ ਕਾਰੇ ਸ਼ਮਾ ਚਿਹਰਾ ਦਸਤੀ ਕੁਨੀ ਤੇ ਹਾਸ਼ ਵਿੱਚ ਚੂ ਬੱਚ ਕੁਸਤਾ ਚਾਰ ਕੇ ਬਾਕੀ ਦਸਤ ਤੇ ਚੀਦਾ ਤੇ ਮਰਦੀ ਕੇ ਆਖ ਕਰ ਕੁਨੀ ਕੇ ਆਤਿਸ਼ ਤਮਾਰਾ ਫਰੋਜ਼ਾ ਕੁਨੀ ਤੇ ਖੁਸ਼ ਗਫਤ ਫੇਰਦਾ ਉਸੀ ਇਹ ਖੁਸ਼ ਜ਼ੁਬਾਨ ਸ਼ਿਤਾਬੀ ਬਵਾਦਕਾਰ ਆਹਰ ਮਨਾ ਕੀ ਮਾ ਬਾਰ ਗਹਿ ਹਜ਼ਰਤ ਆਇਦਿ ਸੁਮਾ ਆਧਾਰੋਜ ਪਾਸ਼ੇ ਵਿ ਸਾਹਿਦ ਸੁਮਾ ਵਗਰ ਨਾ ਤੋ ਈਰਾ ਫਰਾ ਮੋਸ਼ ਕੁਨਦ ਤੁਰਾ ਹਮ ਫਰਾ ਮੋਸ਼ ਯਜਤਾ ਕੁਨਦ ਅਗਰ ਕਾਰੀ ਵਰਤ ਵਸਤੀ ਕਮਰ ਖੁਦਾਵੰਦ ਵਾਸ਼ ਤੁਰਾ ਬਹਰਵਰ ਕਿ ਈ ਕਾਰਣੇ ਕਸਤ ਦੀ ਪਰਵਰੀ ਜੋ ਜੈ ਦਾਸ਼ ਨਾਸੀ ਪਜਾਂ ਤੁਰਾ ਮਨ ਨਾ ਦਾਨਮ ਕੇ ਜੈ ਦਾਸ਼ ਤੂੰ ਕਾਰਹਾ ਦਿਲ ਖਰਾਸ ਸ਼ਨਾਸਦ عاصد ہمیں توں نہ یجدہ کریم نہ خواہد ہمیں توں بدولت عظیم اگر سد کو را با خود ਨਾ قسم مرا اے اعتبارے نائی ذرہ دم حضوری نہ آویں نہئی راش وم اگر شاہ با خواہد من آزار وم خوشا شے شاہ شاہان اورنگزی کے چالاک دست ہست چاہ بوکر کے جہ ہسنل جمال ہست ਬਤਰ ਤਰਤੀਬ ਦਾਨਿਸ਼ ਬਤ ਤਦ ਵੀਰ ਤੇ ਖੁਦਾਵੰਦ ਦੇ ਤੇਗ ਕੇ ਰੌਸ਼ਨ ਜਮੀਰ ਅਸਤ ਹਸਨਲ ਜਮਾਲ ਖੁਦਾਵੰਦ ਬਖਸ਼ੇ ਤੇ ਹੇ ਮੁਲਕ ਮਾਲ ਕੇ ਬਖਸ਼ਿਸ਼ ਕਵੀ ਰਸਤ ਦਰ ਜੰਗ ਕੋ ਮਲਾਇਕ ਸਿਫਤਿ ਨੂੰ ਸੁਰਈ ਆਸ਼ਕੋ ਸ਼ਹਿਨ ਸ਼ਾਹੇ ਔਰੰਗਜ਼ੇਵਾਲਮੀ ਕੇ ਦਾਰਾਏ ਦੌਰਸਤ ਦੂਰ ਅਸਤ ਦੀ ਮਨਮ ਕੁਸ਼ਤੈ ਅਮ ਬੁੱਤ ਪਰਸਤ ਕੇ ਆਂ ਬੁੱਤ ਪਰਸਤੰਦ ਮਨ ਬੁੱਤ ਸ਼ਿਕਸਤ ਬਵੀ ਕਰ ਦਸ਼ੇਬੇ ਵਫਾਏ ਜਮਾਂ ਪਸੇ ਪੁਸਤੋ ਤਦ ਸਾਨਦ ਜੀਆਂ ਬਵੀ ਕੁਦਰਤੇ ਨੇਕ ਯਜਦਾਨ ਪਾ ਕੇ ਅੱਜ ਜੱਕ ਬਾ 10 ਲੱਖ ਰਸਾਨਦ ਹਲਾਕ ਕੇ ਦੁਸ਼ਮਨ ਕੋ ਨਾ ਅਸਤ ਦੋਸਤ ਕਿ ਬਖਸ਼ ਕਾਰ ਬਖਸ਼ਿੰਦਾ ਹੋਸਤ ਰਿਹਾਈ ਦਿਹੋ ਰਹਿ ਨੁਮਾਈ ਦਿਹਦ ਜ਼ੁਵਾਰਾ ਬਸਿਖਤਾ ਕਸਮ ਰਾਤੋ ਕੂਰ ਊ ਕੁਨਦ ਵਖਤਕਾਰ ਯਤੀਮਾ ਮੇਰੂ ਮੇ ਬੁਰਦ ਬੇਅਜ਼ਾਰ ਹਰਾਕ ਅਸ ਕੇ ਓ ਰਾਸ਼ਤ ਬਾਦੀ ਕੁਨਦ ਰਹੀਮੇ ਬਰੋ ਰਹਿਮ ਸਾਜੀ ਕੁਨਦ ਕਸੇ ਖਿਦਮਤ ਵੈ ਅਮਾ ਤੇ ਦੁਸ਼ਮਨ ਬਹਾ ਹੀਲਾ ਸਾਜੀ ਕੁਨਦ ਕੇ ਬਰ ਵੈ ਖੁਦਾ ਰਹਿਮ ਸਾਜੀ ਸ਼ਵਦ ਅਗਰ ਅਕਬਰ ਆਏ ਤੋ 10000 ਨਿਗਹਵਾਨ ਊ ਰਾਸ਼ਵਦ ਕਿਰਤਗਾਰ ਤੁਰਾ ਘਰ ਨਜ਼ਰ ਹਸਤ ਲਸ਼ਕਰ ਵਾਜ਼ਾਰੇ ਕਿ ਮਹਾਰਾ ਨਿਗਾ ਅਸਤ ਯਜ ਦਾ ਸ਼ੁਕਰ ਕਿ ਊਰਾ ਗਰ ਊਰਸਤ ਪਰ ਮੁਲਕ ਮਾਲ ਵਾ ਮਾਰਾ ਆਪਣਾ ਅਸਤ ਯਜ ਦਾ ਤੋ ਗਾਫਲ ਮਸ਼ੌ ਜ਼ੀ ਕੇ ਆਲਮ ਬ ਗੁਜ਼ਰਤ ਸਰੇ ਜਾਪ ਬਬੀ ਗਰਦ ਛੇਬੇ ਵਫਾਏ ਤਮਾ ਕੇ ਬਰ ਹਰ ਬਾ ਗੁਜ਼ਰਤ ਮਕੀ ਨੋ ਗਰ ਜ਼ਬਰ ਆਦਿ ਖਰਾਸ਼ੀ ਮਕੁਨ ਕਸਮਰਾ ਬਾਤੇ ਸਾਤ ਰਾਸ਼ੀ ਮਕੁਨ जो हक यार वासिद जे दुश्मन कुनाद अगर दुश्मन निरा बसत तन कुनाद क्षम दुश्मनी गर हजार आवुरद न यक नवे उरा ला अगंजो अपंजो अरूपो अरेख गाधो अबाधो अरमो अलेख अराघो अरूपो अरिखो अरंग अजन्मो अपरनो अपूतो अपंग ਅਛੇ ਤੋ ਅਪੇ ਤੋ ਅਕਰਮੋ ਅਕਾਮ ਅਖੇ ਤੋ ਅਪੇ ਤੋ ਅ ਭਰਮੋ ਅਪਾਮ ਅਰੇਖੋ ਅਪੇਖੋ ਵਾਲੇਖੋ ਖੁਦਾ ਖੁਦਾਵੰਦ ਬਖਸ਼ਿੰਦ ਹੇ ਰੰਗ ਰੰਗ